ਰੂਪ ਕੋ ਵਸ ਕੋ ਹੋਏ ਨਾ ਹੀ 모ਹੇ ਪ੍ਰਭ ਕੀ ਜੋ ਸਗਲ ਕਟ ਸੋਹੇ ਅੱਛਾ ਪ੍ਰਭ ਦੀ ਗੱਲ ਆਈ ਹੈ ਇਹ ਨਾ ਹਮ ਇੱਕ ਗੱਲ ਪਿੱਛੇ ਪਿਛਲੀ ਬੰਤੀ ਹੈ ਜਿਹੜਾ ਜਪ ਹਰ ਨਾਮ ਨਾਨਕ ਜਪ ਏਕ ਹਰ ਨਾਮ ਇੱਕ ਹਰ ਹਰ ਸ਼ਬਦ ਜਪਿਆ ਸੀ ਖਰੀ ਸ਼ਬਦ ਕਿਆ ਨੇ ਵਿਸ਼ਣੂ ਇਹ ਹੱਥੀਏ ਦੇ ਜਿਹੜਾ ਹਰ ਲਾਉਂਦਾ ਨੇ ਉਹਦਾ ਚੱਕਿਆ ਕਹਨਾ ਪਤਾ ਕਹਨੇ ਜਿਹੜਾ ਹਰ ਹੈ ਨਾ ਇਹ ਕਾਰਨਾਮ ਜਿਹਨੂੰ ਕਹਿੰਦੇ ਇੱਕ ਹਰ ਇਹ ਰੂਪਵਰਤ ਹੋ ਗਏ ਤੁਸੀਂ ਮੂਨਾ ਨਹੀਂ ਤੇਰਾ ਬਾਲਾ ਰੂਪ ਦਿਉਂਦਾ ਬਾਲਾ ਰੂਪ ਦਿਖਾ ਕੇ ਤੀ ਮੂਦਾ ਵਿਸ਼ਣੂ ਕੋਣੀ ਰੂਪ ਧਰਦਾ ਹੈ ਨੂੰ ਮੇਨ ਮੂਨ ਖਿਆ ਹੋਇਆ ਇਹ ਦੇ ਆ ਰੂਪਾ ਮੋਨਾ ਮੰਨ ਲਿਓ ਨਹੀਂ ਹੈ ਕੀ ਗੱਲ ਆ ਗਈ ਇਹ ਉਹ ਬੋਲਤ ਹੋਏ ਨਹੀਂ ਰੂਪ ਬੋਲਤ ਹੋਏ ਨਹੀਂ ਮੋਹੇ ਇਹ ਰੂਪਾ ਤਾਂ ਹਰ ਦਾ ਹੋਰ ਹੋਵਾ ਹਰ ਰੂਪ ਆਇ ਤੋ ਆ ਨਾ ਖਚਕ ਗੱਡਾ ਸੁਮੰਦਰ ਜਿਵਾ ਨਾ ਸਿੱਖਾਈ ਜੋ ਇਥੇ ਹਰ ਤਲਾਫੇ ਨਾਲ ਸ਼ਰਤ ਲਾਤੀ ਰੂਪਨ ਤਾਂ ਅੰਗਿਆ ਜਿਹੜਾ ਰੂਪਨ ਤਾਂ ਮੋਹ ਲਿਆ ਜੀ ਬੋਣੀ ਰੂਪ ਤਾਂ ਲੈ ਜੀ ਉਹ ਤਾਂ ਲੋ ਨਿਖਾਰ ਹੈ ਉਹ ਕਿਹਾ ਤੂੰ ਲੈ ਕੇ ਮੱਝ ਕੇ ਨਾ ਇਹ ਮੋਹ ਉਹ ਪ੍ਰਭ ਦੀ ਜੋਤ ਹੈ ਸਾਰਿਆਂ ਦੇ ਹਿਰਦੇ ਚ ਉਹ ਜਿਹੜਾ ਹਰ ਸਾਡੇ ਆਲਾ ਉਹਦਾ ਜੋਤ ਰੂਪ ਹੈ ਅੰਦਰ ਇਹੋ ਬਾਹਰ ਦੀ ਹੁੰਦਾ ਸਗਲ ਘਟ ਸਾਰੇ ਹਿਰਦਿਆਂ ਵਿੱਚ ਆਉਂਦਾ ਘਟ ਮੈਂ ਹਰ ਜੂ ਬਸਾ ਸੋਹ ਹੈ ਉਹ ਹਰ ਜੁਗਾ ਸਾਰਿਆਂ ਦੇ ਵਿੱਚ ਹੈ ਜਿਹਨੂੰ ਅਸੀਂ ਹਰ ਜੁ ਕਹਿੰਦੇ ਹਾਂ ਅਸਾਰੇ ਸਰੀਰ ਉਹਦੇ ਹੀ ਨੇ ਸੋਹ ਪਰ ਮਾ ਪੇਸ਼ਣ ਜਿਹੜਾ ਤਿਆਹਣਾ ਤਾਂ ਬੇਸ਼ਨਾ ਗਿਆ ਜੁ ਹੈ ਸੋਹ ਹੈ ਸੋਹ ਹੈ ਹੈ ਸੋਹ ਹੈ ਹੈ ਸੋਹਰੇ ਹੂੰ ਰਭੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕੁਛ ਇਸ ਦਾ ਆ ਰਿਹਾ ਹੱਥਾਂ 'ਚ ਛੋੜੀ ਲੱਗਦੀਆਂ ਉਹਨਾਂ ਚਰਨ 'ਚ ਚੱਕਰ 16 ਲੱਗਦਾ ਜਿਨਾਂ ਜਿਤ ਰੂਪ ਜਿਨਾ ਹੋ ਜਾਂਦਾ ਪ੍ਰਭੂ ਜੋ ਸਗਲ ਜਾਨਵਰ ਨਹੀਂ ਹੋਵੇ ਉਹ ਰੂਪ ਨਹੀਂ ਰਹਿੰਦਾ ਸੋ ਆਪਕੋ ਜੋਤ ਕਰਤੀ ਜਾਂ ਸ੍ਰੀ ਦੋਜੀ ਜੋ ਹੈ ਨ ਉਹ ਤਾਂ ਬਦਲਦਾ ਹੈ ਰੂਪ ਬਦਲਦੇ ਬਸੇ ਉਹ ਵੀ ਹੋਵੇ ਰੂਪ ਉਹੀ ਰੂਪ ਸੋਹਣਾ ਲੱਗਦਾ ਜੇ ਜੋਤ ਮਤਲਬ ਹੈ ਨਾ ਜੋਤ ਦਾ ਵੀ ਮਤਲਬ ਹੈ ਨਾ ਤੁਸੀਂ ਹਾਂ ਜਦੋਂ ਹੋਏ ਕਿ ਆਪੋ ਗਰਭ ਹੈ ਜਾਂ ਸਭ ਕੁਝ ਇਸ ਦਾ ਹੋਏ ਕਿ ਆਪੋ ਗਰਭ ਹੈ ਜੇ ਕੋਈ ਤਾਨਾ ਤਾਨਵਾਨ ਹੋ ਕੇ ਜ਼ਰਬ ਕਰੇ ਇਹ ਵੀ ਉਹ ਹੀ ਪਾਗਲ ਪੜੇ ਜਾਂ ਸਭ ਕੁਝ ਕਿਸਕਾ ਦਿਆ ਕਰੇ ਕਿਤਾ ਸਰਬ ਸਾਰਾ ਪਰਮੇਸ਼ਰ ਦਾ ਦਿੱਤਾ ਹੋਇਆ ਹੈ ਪੈਦਾ ਹੀ ਹੋਇਆ ਕੀਤਾ ਹੋਇਆ ਇਹ ਜੇ ਤੂੰ ਸਾਨੂੰ ਪੈਦਾ ਕਰਤਾ ਹੋ ਜਿਵੇਂ ਪਹਿਲੇ ਤਰਫ ਜਿਹੜਾ ਸੀ ਇਹ ਹਾਲਾਤ ਤੈਨੂੰ ਐਸੇ ਮਾਤ ਦੇ ਦਿੱਤਾ ਅਕਲ ਤੇ ਬੁਦੀਆ ਦੇ ਦਿੱਤੀ ਇਦੇ ਵਾਸਤੇ ਦੇਣਾ ਕੀ ਕਰਨਾ ਹੈ ਉਸ ਤਾਂ ਕਿ ਨਾ ਵਰਤਣਾ ਇਹ ਤੈਨੂੰ ਕਿਹਨਾਂ ਲਾਭ ਲੈਣਾ ਚਿੰਦੇ ਤੋਂ ਖਰਚ ਕਰਨਾ ਹੈ ਆੜੇ ਤੋਂ ਖਰਚਣਾ ਹੈ ਜਾਂ ਤਰ ਕੋ ਨਸਾਨ ਹੋ ਜਾਣਾ ਹੈ ਦਾਤੂਆ ਜਾਣਾ ਹੈ ਉਹਦੇ ਨਾਲ ਨਸਾਨ ਹੋ ਜਾਣਾ ਕੋਈ ਕੁਝ ਨਹੀਂ ਹੋ ਸਕਦਾ ਇਹ ਤਾਂ ਕੁਦਰਤੀ ਹੈ ਫਰ ਉਹ ਗਰਮ ਕਰਨਾ ਹੈ ਇਹ ਉਹ ਚੀਜ਼ ਦਾ ਜ਼ਰੂਰ ਕਰੀਦਾ ਜਿਹੜੀ ਆਪਣਾ ਬਸ ਚ ਹੈ ਕਰਬ ਕਰਤਾ ਹੈ ਦੇਖੋ ਸੋਸ਼ਲ ਮੀਡੀਆ ਨਹੀਂ ਕਰਦੇ ਵੀ 19 ਬੜੀ ਜ਼ਿਆਦੀ ਹੈ ਕਰਬ ਤੇ ਪ੍ਰਹਾਰ ਤਾਂ ਠੀਕ ਹੈ ਕਰਬੇ ਨਾਮ ਤੋਂ ਖਲਾਸ ਅਸਲ ਦਾ ਕਾਂਡਾ ਡਾੜ ਬਣਾਇਆ ਇਹ ਨਾ ਆਉਣਾ ਨਹੀਂ ਜਾਣਾ ਖੁਬ ਨਾ ਆਵੇਂ ਨਾਲ ਵੇਖ ਤਾਂ ਟਾਰਗੇਟ ਕੋਲ ਹੈ ਤਾਂ ਵਾਸਤੇ ਰਾਜ ਇਹ ਕਰੂਗੇ ਜਿਹੜਾ ਜੀ ਨਾਲ ਜਿੱਤਦਾ ਹੈ ਉਹ ਤਾਂ ਉਹ ਤਾਂ ਨਹੀਂ ਦੌੜਦੌੜਾ ਸ੍ਰੀ ਘਪਾਉਂਦਾ ਤੈਨੂੰ ਇਹ ਜਿਹਨੇ ਦਿੱਤਾ ਉਹਦਾ ਸ੍ਰੀ ਘਪਾਉਂਦਾ ਤੈਨੂੰ ਇਹ ਕਰ ਸਭ ਕੁਝ ਹੈ ਉਹ ਜੀ ਉਹਦਾ ਤਾਂ ਖਲਾਫ ਖੜਾ ਹੋ ਗਿਆ ਤੂੰ ਉਨੀਆ ਬਰੋਵਾ ਜੇ ਪ੍ਰਸਾਦ ਛਤੇ ਉਹਨਾਂ ਸਗਾ ਆਈ ਤੇ ਸਾ ਤੋਂ ਰਖਮਨ ਮੈਂ ਤੇ ਇਹ ਆਉਤੀ ਬਜਾਇਆ ਉਹਦਾ ਤਦਵਾਦ ਕਰਨੇ ਤੂੰ ਘਰ ਵਿੱਚ ਲੈ ਰਿਐਕਸ਼ਨ ਹੋ ਗਿਆ ਸ਼ਰੀਰ ਖਰਾਬ ਹੋ ਗਿਆ ਤੇ ਇਹਦਾ ਸਰਾਬ ਹੋ ਗਿਆ ਹੈ ਗ੍ਰਸਤਖਾਤੀ ਦਿੱਤੀ ਦਾ ਸਰਾਬ ਹੋ ਗਿਆ ਜੇ ਤਾਂ ਨਗਰ ਹੋਗਾ ਤੇ ਹੋਰ ਪਾਸਾ ਖਰਾਬ ਆ ਇਹ ਸੜ ਗਿਆ ਤੁਸੀਂ ਹਾਂਜੀ ਆਪ ਸੂਰਜੋ ਕੋਈ ਕਹਾਵਾ ਹੈ ਪ੍ਰਭ ਦੀ ਚਲਾ ਬਿਨਾ ਕਹਿ ਸਾਵਾ ਹੁਣ ਇਹ ਮੈਂ ਬਹੁਤ ਸੂਰ ਗੋਰੀਓ ਤੇਰੇ ਅੰਦਰ ਆਤਮਾ ਉਹਦੀ ਕਲਾ ਦੇ ਬਿਨਾ ਤੂੰ ਦਸ ਕੀ ਕਰੇਂ ਉਹ ਕੋਈ ਹੋਰ ਜਿਆਦਾ ਸਾਥ ਖਾਂ ਤੋਂ ਇਹਦਾ ਨਾ ਉਹ ਫੇਰ ਅਸ ਕੀ ਕਰਨਗੇ ਕੋਈ ਨਹੀਂ ਤੇ ਗਿਟੇ ਨਹੀਂ ਬਰਬਤੀ ਕਲਾ ਵੀ ਹੋਣਾ ਜਿਹੜਾ ਕਿ ਮੈਂ ਜੋ ਉੱਥੋਂ ਉਹਨਾਂ ਨੇ ਇਸੀ ਵਾਰ ਕੋਲੇ ਗਵਰਨਰ ਵਿਚਾਰਾ ਕੀ ਕਰੂਗਾ ਹਾਂ ਫਾਈਸਤੀ ਵਾਦ ਕਈਆਂ ਸ਼ਕਤੀਆਂ ਸਾਧੀਆਂ ਹੁੰਦੀਆਂ ਤੇ ਹੋਤੀਆਂ ਸ਼ਕਤੀਆਂ ਉਹਦੀਆਂ ਉਹਨਾਂ ਚ ਲੈਣਾ ਇਹਨਾਂ ਸਰਕਾਰ ਦੀ ਜਾਂਚ ਸਰਕਾਰ ਦਾ ਹੀ ਖਾਤੇ ਹੋਏ ਹਾਂ ਜੇ ਕੋ ਹੋਏ ਦਾਤਾਰ ਇਸ ਦੇਰ ਹਰ ਜਾਂਦੇ ਗਵਾ ਦੇਖੋ ਹੋਏ ਬਹਿਦਾਤਾਰ ਜੇ ਕੋ ਦਾਤਾ ਆਪੇ ਬਣੇ ਰਤਨ ਨਾ ਉਹ ਜਦਾ ਕਹਾਂ ਦੇਣਾ ਵਡਾ ਉਹ ਤਾਂ ਗਵਾ ਦੇ ਗਵਾ ਇਹ ਫਾਗੜਾ ਕੋਈ ਨਹੀਂ ਉਹ ਸ਼ਾਂਤ ਨਾ ਰਿਹਾ ਬੰਦਾ ਬਾਗ ਲੈ ਗਿਆ ਫਿਰ ਕਹਿੰਦਾ ਕਿਥੇ ਪਗਦੂ ਦੇ ਬੈਠੇ ਸ਼ਾਮਿੰਦ ਹੁੰਦਾ ਦੇ ਕੇ ਫਿਰ ਜਿਸ ਗੁਰੂ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਸ ਗੁਰ ਪ੍ਰਸਾਦ ਕੋ ਰੋਗ ਨਹੀਂ ਟੁੱਟਦਾ ਗਿਆਨ ਦੇ ਵਿੱਚ ਆਪੇ ਟੁੱਟਿਆ ਜਦ ਘੋਰ ਪ੍ਰਸਾਦ ਟੁੱਟੇ ਹਾਂ ਰੋਗੇ ਧਿਆਨ ਦੇ ਕਰਪਾ ਨਸਲਾ ਅਹਰੋਗੇ ਆਪੇ ਛੱਡਿਆ ਆ ਇਹ ਨਹੀਂ ਛੱਡਿਆ ਜਾ ਸਕਦਾ ਬਨਾ ਪ੍ਰਾਂਤਿਆਂ ਕੋਲ ਕੁਲਸ ਰਾਤ ਟੁੱਟੇ ਹਾਂ ਸਦਾ ਅਰੋਗ ਨਾਨਕ ਸੋਜਨ ਸਦਾ ਰੋ ਫਿਰ ਰੋਗੇ